ਸ਼ਲੋਕ ਮਹੱਲਾ ਚੌਥਾ ਸੁੱਤਿਆ ਹਰ ਪ੍ਰਭ ਚੇਤ ਮਨ ਹਰ ਸਹਿਜ ਸਮਾਦ ਸਮਾਈ ਜਨ ਨਾਨਕ ਜਨ ਨਾਨਕ ਹਰ ਹਰ ਚਾਓ ਮਨ ਗੁਰ ਤੁਠਾ ਮੇਲੇ ਮਾਈ ਇਹ ਜਿਹੜੀ ਆਪਾਂ ਆराधना ਕਰਦੇ ਆਂ ਨਾਮ ਜਪਦੇ ਆਂ ਜੋ ਵੀ ਕੁਝ ਕਰਦੇ ਆਂ ਇਹ ਕਰਦੇ ਆਂ ਸੁਪਨੇ ਦੇ ਵਿੱਚ ਆਦਮੀ ਸੁੱਤਾ ਹੁੰਦਾ ਚਾਹ ਸੰਸਾਰ ਸੁਪਨਾ ਹੈ ਰਾਹ ਰਾ ਰੱਖੋ ਯਾ ਮਨ ਆਪਣਾ ਇਹ ਸੰਸਾਰ ਸਗਲਾ ਸੁਪਨਿਆਂ ਵਾਲੇ ਆਦਮੀ ਨੂੰ ਸੁਚਬੂਦਿਆਂ ਜਾਂਦਾ ਸੱਚ ਸੁੱਤਿਆਂ ਜੇ ਨਾ ਹਰਦੇ ਆ ਉੱਠਦੇ ਨਾ ਮਾਪ ਇਸ ਕਰਕੇ ਜਿਹੜੇ ਸੁੱਤੇ ਹੋਏ ਨੇ ਆਦਮੀ ਉਹ ਅਰਾਜ ਕਰਦੇ ਜੀ ਸੁੱਤਿਆਂ ਹਰ ਪ੍ਰਭ ਚੇਤ ਸੁਤਿਆ ਹੋਇਆ ਜਿਹੜਾ ਹੈ ਉਹ ਹਰ ਪ੍ਰਭ ਨਾਲ ਚੇਤਨ ਹੋਵੇ ਉੱਥੇ ਜਾਗੇ ਸੁੱਤਿਆ ਹਰ ਪ੍ਰਭ ਚੇਤ ਸੁੱਤਿਆ ਹਰ ਪ੍ਰਭ ਚੇਤ ਚੇਤ ਬੰਨ ਹਰ ਸਹਿਜ ਸਮਾਦ ਸਬਾਏ ਜਾਗ ਕੇ ਜਾਗਣਾ ਸਹਿਜ ਹੋਣਾ ਸਹਿਜ ਹੋਇਆ ਸੁਪਨਾ ਆਪੇ ਹੀ ਬੰਦ ਹੋ ਜਾਊਗਾ ਜੇ ਜਾਗੇਗਾ ਸਹਿਜ ਹੋਏਗਾ ਸਮਾਦ ਦਾ ਮਤਲਬ ਹੈ ਮੰਦਾ ਸੁਪਨਾ ਬੰਦ ਹੋਣਾ ਮਨ ਤੇਰੇ ਵਿੱਚ ਸਮਾਜੂਗਾ ਸੁਪਨਾ ਝੂਠਾ ਸਾਬਤ ਹੋ ਜਾਊਗਾ ਇਸ ਕਰਕੇ ਜਾਗ ਜਾਗਿਆ ਸਮਾਧ ਹੋ ਗਿਆ ਤੁਹਾਨੂੰ ਸਮਾਧ ਤਾਂ ਹੁ ਦੈਰੀ ਜੋ ਤਾਦਾ ਸਮਾਧੀ ਲਗਦੀ ਉਹਦੀ ਉਦੀ ਜਾਗ ਦੀ ਸਮਾਧੀ ਲਗਦੀ ਆ ਹਰ ਸਮਾਧ ਸਮਾਏ ਸਮਾ ਗਿਆ ਆਪਣੇ ਮੂਲ ਤੇ ਸਮਾ ਗਿਆ ਸੁਪਨੇ ਵਾਲਾ ਸਰੀਰ ਜਿਹੜਾ ਤੁਰਿਆ ਫਿਰਦਾ ਸੀ ਜਾਗ ਦੀ ਸਾਰ ਕਿੱਥੇ ਗਿਆ ਅਸਲੀ ਸਰੀਰ ਦੇ ਵਿੱਚ ਹੀ ਸਮਾ ਗਿਆ ਐਵੇਂ ਮਨ ਸਮਾ ਜਾਂਦਾ ਆਪਣੇ ਮੂਲ ਤੇ ਜੀ ਚੁੱਤਿਆ ਹਰ ਪ੍ਰਭ ਚੇਤ ਮਨ ਹਰ ਸਹਜ ਸਮਾਦ ਸਮਾਏ ਮਨ ਤੇ ਸਿਆਰੀ ਹੈ ਬਣ ਕਰਕੇ ਚੇਤ ਠੀਕ ਹੈ ਮਨ ਦੇ ਵਿੱਚ ਕਹਿੰਦਾ ਭਾਵ ਵੀ ਬਾਹਰ ਮੁਖੀ ਨਾ ਹੋ ਅੰਤਰ ਮੁਖੀ ਹੋ ਉਦਰੇ ਜੀ ਨਾ ਚੇਤਨਾ ਜੀ ਉਦਰੇ ਹੀ ਦੇਖਦਾ ਹੋਰ ਕੀ ਹੈ ਠੀਕ ਹੈ ਜੀ ਜਨ ਹਰ ਹਰ ਚਾਉ ਮਨ ਗੁਰ ਤੁਠਾ ਮੇਲੇ ਮਾਈ ਦੇ ਮਨ ਵਿੱਚ ਚਾਉ ਹੈ ਕਹਦਾ ਹਰ ਦਾ ਚਾਉਆ ਜਨਾਨ ਨੇ ਤਾਂ ਹਰ ਹਰ ਚਾਉ ਮਨ ਵਿੱਚ ਚਾਉ ਆ ਹਰ ਹਰ ਦਾ ਤੇ ਕੋਈ ਗੁਰ ਮਿਹਰਬਾਨ ਹੋਵੇ ਤਾਂ ਮੱਤ ਦੇ ਦੇਵੇ ਮੇਲੇ ਭਾਈ ਆ ਮੱਤ ਦੇ ਦੇਵੇ ਗੁਰ ਦੇ ਦੇਵੇ ਤੇ ਮੇਲ ਮਿਲ ਗਿਆ ਪੁੱਲ ਜਾ ਗਿਆ ਹਰ ਇੱਕ ਸੇਤੀ ਪਰਹੜੀ ਜਨ ਨਾਨਕ ਇੱਕ ਆਧਾਰ ਹਰ ਪ੍ਰਭ ਇਕ ਸਤੇ ਗਤਪਤ ਮੇਰਾ ਤਾਂ ਹਰ ਦੇ ਨਾਲ ਪ੍ਰੇਮ ਉਹਦੇ ਨਾਲ ਪਿਰਣੀ ਹੈ ਹਰ ਇੱਕੋ ਮੇਰੇ ਚਿੱਤ ਇੱਕੋ ਮੇਰੇ ਚਿੱਤ ਵਿੱਚ ਚਿੱਤ ਵਿੱਚ ਵੀ ਇੱਕ ਅਤਰਮਾਨਿਕ ਹੋਣ ਹੈ ਕਿਰਤਮਾਨ ਵਿੱਚ ਇਕਤਾ ਹੈ ਹੁਣ ਜਨ ਨਾਨਕ ਇੱਕ ਆਧਾਰ ਹਰ ਜਨਾਨ ਨੇ ਕਹਿੰਦਾ ਹੁਣ ਮੇਰਾ ਆਧਾਰ ਵੀ ਇੱਕੋ ਹਰ ਹੀ ਆਧਾਰ ਹੈ शरीर वाला आधार नहीं उड़ मेरा अच्छा ता तन का तेरे गुडी छड़ती एक प्रभु तेरी है पति है चला वाली जानती पत घर पहुंचने दी पति घर जाए के चलता रहूंगा इज्जत नाल जी औड़ी पंचे शब्द वजे मत ਗੁਰਮਤ ਵਡਭਾਗੀ ਅਨਹਦ ਵਜਿਆ ਆਨੰਦ ਮੂਲ RAM ਸਭ ਦੇਖਿਆ ਗੁਰ ਸ਼ਬਦੀ ਗੋਬਿੰਦ ਗਜਿਆ 25 ਸ਼ਬਦ ਵਜੇ ਵਜੇ ਕੋਈ ਨਾ ਵਜੇ ਉਦਾਜੇ ਕੋ ਕੋ ਤੁੰਤ ਹਾਇਰ ਨੂੰ ਸਿਆਰੀ ਹੁੰਦੀ ਸੁਪ੍ਰੇਮ ਜਿਹੜਾ ਸ਼ਬਦ ਗੁਰਮਤਿ ਲੈ ਲਈ ਗੁਰਮਤਿ ਦੇ ਬੇਚਰੇ ਆ ਗੁਰਮਤਿ ਤੇ ਦੀ ਵਿਚਾਰ ਧਾਰਾ ਕੇ ਫਿਰ ਗਿਆ ਰਹਾ ਤਾਂ ਉੱਧਰੋਂ ਸ਼ਬਦ ਗੁਰੂ ਪ੍ਰਗਟ ਹੋ ਗਿਆ ਬੜ ਭਾਗੀ ਅਨੰਦ ਵਜਿਆ ਵੱਡੇ ਭਾਗੋਂ ਅਨੰਦ ਵਜ ਪਿਆ ਸ਼ਬਦ ਗੁਰੂ ਪ੍ਰਗਟ ਹੋ ਗਿਆ ਆਨੰਦ ਗੂੜ ਰਾਮੂ ਸਭ ਦੇਖਿਆ ਆਪਣੇ ਨਾਲ ਲੱਗਦਾ ਕਹਿੰਦਾ ਸੀ ਅਨੰਦ ਵਾਂ ਬੋਲ ਸੀ ਜਿਹੜਾ ਜੀ ਨੂੰ ਮਿਲ ਕੇ ਰੰਤ ਬਹਿਣਾ ਸੀ ਦੇਖ ਲਿਆ ਉਹ ਅੰਮ੍ਰਿਤ ਦੇਖ ਪਿਆ ਇਹਨਾ ਬੋਲਦਾ ਹੀ ਸੀ ਫਿਰ ਦਿਖ ਵੀ ਪਿਆ ਦਰਸ਼ਨ ਹੋ ਗਿਆ ਉਹਦਾ ਬੋਲ ਸੁਣਿਆ ਜਾ ਤਾਂ ਫਿਰ ਦਰਸ਼ਨ ਹੋ ਗਿਆ ਗੁਰ ਸ਼ਬਦ ਗੋਬਿੰਦ ਗੱਜਿਆ ਗੁਰ ਸ਼ਬਦ ਆ ਜਿਹੜੇ ਗੁਰ ਨੇ ਨਾ ਗੁਰਬਾਣੀ ਬੋਲੀ ਤਾਂ ਛੇੜ ਵਾਂਗੂ ਗੱਜਿਆ ਫਿਰ ਨਰਪੈ ਹੋ ਕੇ ਬੋਲੇ ਗੋਬਿੰਦ ਗਜਿਆ ਤੇ ਸਤਗੁਰ ਗੱਜਿਆ ਵੀ ਦੱਸਿਆ ਵੀ ਉਹ ਥੋੜੀ ਸੀ ਜਿਹੜੀ ਬਾਣੀ ਬਿਨਾ ਗੱਲਾਂ ਤੇ ਜਦ ਪ੍ਰਗਟ ਕੀਤੀ ਗੱਜ ਵੱਜ ਕੇ ਪ੍ਰਗਟ ਕੀਤੀ ਨਿਰਭੈ ਹੋ ਕੇ ਪ੍ਰਗਟ ਕੀਤੀ ਤਾਂ ਲੋਗਾ ਮੈਂ ਨਾਮ ਤਰ ਪਾਇਆ ਤੇ ਲੋਗਾ ਮੈਂ ਨਾਮ ਤਨ ਪਾ ਲਿਆ ਠੀਕ ਹੈ ਜੀ ਜਿਹੜਾ RAM ਮੈਂ ਇਹੀ ਕਹਿਣਾ ਚਾਹੁੰਦਾ ਆਨੰਦ ਮੂਲ RAM ਸਭ ਦੇਖਿਆ ਵੀ ਜਿਹੜਾ ਮੂਲ ਮੇਰਾ RAM ਸੀ ਉਹ ਮੈਨੂੰ ਹੁਣ ਦਿਖ ਗਿਆ ਹੈ ਜੀ ਸਵੇਰ ਘੱਟ ਪਹਿਲਾਂ ਬੋਲਦਾ ਸੀ ਇਹ ਨਾ ਹੈ ਦੀ ਸੀ ਠੀਕ ਹੈ ਹੁਣ ਉਹੀ ਗੱਜ ਰਿਹਾ ਅੰਦਰੋਂ ਉਹੀ ਗੱਜ ਰਿਹਾ ਹੁਣ ਉਹ ਗੱਜ ਰਿਹਾ ਹਾਂ ਜੀ ਹਾਂ ਜੀ ਹਾਂਦ ਜੁਗਾਦ ਵੇਸ ਹਰ ਏਕੋ ਮਤ ਗੁਰਮਤ ਹਰ ਪ੍ਰਭ ਭਜਿਆ ਹਰ ਦੇਵੋ ਦਾਨ ਦਇਆਲ ਪ੍ਰਭ ਜਨ ਰਾਖੋ ਹਰ ਪ੍ਰਭ ਲੱਜਿਆ ਆਦ ਜੁਗਾਦ ਵੇਸ ਹਰ ਏਕੋ ਆਜੂਆ ਜਿਹਦਾ ਤਾਂ ਹਕੂਮਤ ਐ ਕੋਈ ਵੇਸ ਰਹਿਂਦਾ ਜੱਦੀ ਦੁਨੀਆ ਸਾਜੀ ਐ ਕੋਈ ਵੇਸ ਐਦਾ ਆਖਰ ਤੱਕ ਇਹਦਾ ਇਹੀ ਵੇਸ ਰਹਿਣਾ ਹੱਤ ਗੁਰਬਤ ਹਰਬ ਬੱਜਿਆ ਬੱਜਿਆ ਲਫਜ਼ ਬੰਦ ਲੁੱਦੀ ਲੱਗਦਾ ਠੀਕ ਐ ਤੇ ਭੱਜਿਆ ਚਾਹੀਏ ਭੱਜਿਆ ਗੱਲ ਨਹੀਂ ਬਣਦੀ ਐ ਭੱਜਿਆ ਹੋਵੇ ਤਾਂ ਗੱਲ ਬਣਦੀ ਭੱਜਿਆ ਦਾ ਮਤਲਬ ਇਹ ਭੱਜਣਾ ਹੋਊਗਾ ਯਾ ਟੁੱਟਣਾ ਹੋਊਗਾ ਦੋਹੀ ਠੀਕ ਨਹੀਂ ਆ ਦੋਹੀ ਠੀਕ ਉਹ ਤਾਂ ਨਾਮ ਤੋਂ ਹੀ ਭੱਜਿਆ ਹਾਂਜੀ ਜਾਂ ਗਿਆ ਜੁੜਨਾ ਸੀ ਟੁੱਟਣ ਦੀ ਪਹਿਲਾਂ ਦੇਖ ਲੈਨੇ ਭਿਜਿਆ ਸ਼ਬਦੋਂ ਕਿੰਨੀ ਗੁਰਬਾਣੀ ਚ ਹਾਂਜੀ ਆ ਭਿ ਜੋ ਵੀ ਹਾਂਜੀ ਕਿਰ ਭਿਜੋ ਸਿਜੋ ਕੰਬਲੀ ਇੱਕ ਤਾਂ ਉਹ ਆਉਂਦਾ ਕੋਈ ਗੱਲ ਭਿਜਨ ਨਹੀਂ ਸੈਸ ਵਿੱਚ ਭਿਜ ਹਾਂਜੀ ਤੇ ਆਪ ਜੀ ਵੀ ਵਿਥਰਾ ਆਉਂਦਾ ਤੇ ਜਈ ਤਨਵਾ ਤਿਸ ਕਾ ਅੰਤਰ ਚਿਤ ਨ ਭਿਜਈ ਮਨਮੁਖ ਆ ਭਿਜੇ ਨਾ ਭਿਜਈ ਹਾਂ ਮਨਮੁਖ ਮਨ ਨਾ ਭਿਜਈ ਮੈਲੇ ਚਿਤ ਜੀ ਸੱਚ ਸੱਚੇ ਕੀ ਸਿਫਤ ਸਲਾਹ ਹੈ ਸੋ ਕਰੇ ਜਿਸ ਅੰਤਰ ਭਿਜੈ ਭਜਿਆ ਬਣਾਂਗੇ ਇਹਨੂੰ ਭਜਿਆ ਨਾਲ ਬਣਦੇ ਅਰਥ ਹਰ ਮਤਲਬ ਕਿਸੇ ਨੂੰ ਯਾਦ ਕਰਨਾ ਭਜਨ ਹਾਂਜੀ ਭਜੇ ਨਾਲ ਜੁੜ ਜਾਂਦੇ ਜੇ ਸੁਰਬਤੀ ਹਰ ਪ੍ਰਭ ਭਜਿਆ ਹਾਂ ਗੁਰਮਤਿ ਨਾਲ ਹਰ ਪ੍ਰਭ ਦਾ ਭਜਨ ਕੀਤਾ ਕਹਿਣ ਦਾ ਭਾਵ ਉਹ ਗੱਜਿਆ ਉਹ ਨਾ ਪਿੱਛੇ ਭਜਿਆ ਤਾਂ ਨਾ ਉਹਦਾ ਕਾਫੀਆ ਨਹੀਂ ਮਿਲਦਾ ਫਿਰ ਹਾਂ ਇਹਨੂੰ ਫਿਰ ਭਜਿਆ ਹੀ ਪੜਾਂਗੇ ਵੀ ਜੁੜ ਗਿਆ ਨਾਲ ਜੀ ਜਾਂ ਠੀਕ ਹੈ ਫਿਰ ਉਹ ਕਾਫੀਆ ਲੋੜ ਵੇਲੇ ਨਹੀਂ ਮਿਲਦਾ ਤੇ ਫਿਰ ਆ ਫਿਰ ਇਹਨੂੰ ਭਜਿਆ ਪੜਾਂਗੇ ਅੱਛਾ ਨਹੀਂ ਠੀਕ ਹੈ ਲੱਗਦਾ ਭਜਿਆ ਤਿਸ ਜਨ ਜਿਨ ਭਜਿਆ ਪ੍ਰਭ ਨਿਰਵਾਣ हां भजना ना ठीक है भजन भजन वाला आजूगा जी जे आपा काफियां मलाउने ਜੇ त अनर्थ हो जाने है जे आपा भजया पढ़दे है फिर अर्थ ठीक है जी हां हां अर्थ ठीक है जी जेखे की बने जी आजूगा तो वेस हर एको मत गुरमत हर प्रभु भजया हर देवो दान दयाल प्रभु जन राखो हर प्रभु लज्जया ਇੱਜ਼ਤ ਵਾਜਵੇ ਇੱਜ਼ਤ ਨਾਲ ਘਰ ਚੱਲਿਆ ਜਾਊ ਜੀ ਸਭ ਧੰਨ ਕਹੋ ਗੁਰ ਸਤ ਗੁਰੂ ਗੁਰ ਸਤ ਗੁਰੂ ਜਿੱਤ ਹਰ ਪਰਦਾ ਕੱਜਿਆ ਸਭ ਧੰਨ ਕਹੋ ਜਿਹਨੂੰ ਕਹੋ ਗੁਰ ਸਤ ਗੁਰੂ ਨੂੰ ਧੰਨ ਕਹੋ ਗੁਰ ਮਿਲ ਜਿੱਤੇ ਮਿਲਣ ਕਰਕੇ ਹਰ ਪਰਦਾ ਕੱਜਿਆ ਹਰ ਪਰਦਾ ਚੱਕ ਲਿਆ ਮੇਰਾ ਮੰਦਾ ਜਿੰਨੇ ਬੰਦੇ ਗਲਤੀਆਂ ਕੀਤੀਆਂ ਨੇ ਇੱਕੋ ਨਹੀਂ ਦੱਸੀ ਇੱਕੋ ਨਹੀਂ ਆਪਣੇ ਵਿੱਚ ਗੁਨਾ ਲਿਆ ਸ਼ਮਾ ਕਰਤਾ ਠੀਕ ਹੈ ਜੀ ਸਤਿਗੁਰੂ ਸ਼ਬਦ ਆਪਣੇ ਗੁਰੂਆਂ ਨੇ ਵਰਤਿਆ ਦਸਾਂ 66 ਪਰ ਜਿਹੜਾ ਵਾਹਿਗੁਰੂ ਸ਼ਬਦ ਆ ਉਹ ਇੱਕ ਪੱਟ ਦਾ ਹੀ ਵਰਤਿਆ ਹੈ ਨਾ ਜੀ ਗੁਰ ਸਤਿਗੁਰੂ ਹੈ ਨਾ ਗੁਰ ਪਹਿਲਾਂ ਵਰਤਿਆ ਸਤਿਗੁਰੂ ਬਾਅਦ ਚ ਵਰਤਿਆ ਗੁਰਨੇ ਤਾਂ ਆਮਾਫ਼ ਕੀਤਾ ਪਹਿਨਾ ਦਰਿਆ ਜੋ ਮਾਫ਼ ਹੋਇਆ ਹੋਇਆ ਆਪਣਾ ਦਰਗਾਹ ਦਾ ਸੰਦੇਸ਼ ਦਿੱਤਾ ਹੈ ਨਾ ਜੀ ਇਹ ਇਹ ਦਿੰਦਾ ਬੁਲਾਉਣ ਵਾਲਾ ਸਤਿਗੁਰੂ ਹੈ ਬੋਲਣ ਵਾਲਾ ਗੁਰ ਹੈ ਜੀ ਹਾਂ ਕਿ ਸਤਿਗੁਰੂ ਵੀ ਕਹਿ ਸਕਦੇ ਹਾਂ ਠੀਕ ਹੈ ਜੀ ਇੱਥੇ ਸੱਤਵੀਂ ਪੌੜੀ ਸਮਾਪਤੀ ਹੈ ਜੀ ਹਾਂ ਜੀ ਹਾਂ